ਜਿਸਕੇ ਮਾਨੁ ਪਰਮ ਬ੍ਰਹਮ ਦਾ ਨਿਵਾਸ ਇਸ ਦਾ ਨਾਮ ਸਤਿਰਾਮਦਾਸ ਜਿਸਕੇ ਮਾਨੁ ਪਰਮ ਬ੍ਰਹਮ ਦਾ ਨਿਵਾਸ ਉਹ ਰਾਮਦਾਸ ਕਾਹਨੇ ਦੇ ਪਿਓ ਦਾ ਨੂੰ ਸੀ ਸਬਦੇ ਬਾਛਾ ਦਾ ਪਾਣੀ ਮਾਸ਼ਾ ਦੀ ਪਾਣੀ ਉਹ ਕਹਿੰਦਾ ਰਾਮਦਾਸ ਕੌਣ ਹੁੰਦਾ ਅਸਰ ਜਿਹੜਾ ਪਹਿਲਾ ਇਨਾਨਾ ਨੌ ਜੇਠਾ ਸੀ रामदास नाम क्यों रखा गया ओदा कारण बता रामदास रखते चुगदोड पे यो तांगा है रामदास गोणमार्दिका नाम है दरअसल और ब्रह्म के जिसके मानु पाद ब्रह्म का आवाज इनके बीच शब्द गुरु का निवास होए पारब्रह्मता ਜਿਸ ਦਾ ਨਾਮ ਸਤਰਾੰ ਰਾਸੋ ਦਾ ਨਾਮ ਅਸਲੀ RAMਦਾਸ ਦਾ ਹੈ ਉਸ ਸਤਰਾੰ ਅਸਲੀ RAMਦਾਸ ਅਸਲੀ ਰਾਉ ਦਾ ਤਾਂ ਸਾਥੀ ਤੋਂ ਹੀ ਹੈ ਪਰ RAMਦਾਸ ਨੂੰ ਕੋਈ ਬਣਦਾ RAMਦਾਸ ਨੂੰ ਨੋ ਪੋਈ ਲਓ ਸੱਚੀ ਮੁੱਚੀ ਦਾ RAMਦਾਸ ਹੈ ਉਸ ਦਾ ਨਾਮ ਸਤਰਾੰ ਰਾਸੋ ਅਕਾਈ RAMਦਾਸ ਉਸੇ ਦਾ ਨਾਮ ਹੋਣਾ ਚਾਹੀਦਾ ਉਰਾਖਲੋਂ ਕੋਈ ਨਹੀਂ ਇਸ ਕਰਕੇ ਜਿੱਥੇ ਤੋਂ ਰਾਮਦਾਸ ਜੀ ਹੋ ਰੱਖਿਆ ਉਹ ਹਿੰਦੇ ਪਰਮ ਦਾ ਨਵਾਸ ਹੋਦਾ ਸਬੂਤ ਹੈ ਆਤਮਰਾਮ ਕਿਸ ਨਦਰੀ ਆਇਆ ਦਾਸ ਦਸ਼ੰਤਨ ਭਾਇ ਤੇ ਨਹੀਂ ਪਾਇਆ ਕਹਿੰਦਾ ਆਤਮਰਾਮ ਕਿਸ ਨਦਰੀ ਆਇਆ ਅਰ ਆਤਮ ਵੀ ਹੁੰਦਾ ਹੋ ਜਾਂਦਾ ਹੈ ਪਰਮ ਦਾ ਨਵਾਸਾ ਅਰ ਦਰਸੀ ਤਾਂ ਹੋਇਆ ਹੋਇਆ ਆਤਮਰਾਹੀ ਹੈ ਜੀ ਸੁਖਮ ਜੀ ਨੂੰ ਯਾਦ ਦੇਖ ਸਕਦਾ ਹੈ ਜਿਹਨੇ ਸੁਖਮ ਆਪਣੇ ਹੱਥੇ ਜੋ ਉਹਨੂੰ ਤਾਂ ਸੁਖ ਵੀ ਹੈ ਪਰ ਉਦਾਰਸ਼ਨ ਕਰ ਲੈ ਜਿਹਦਾ ਕਰਨ ਵਾਲਾ ਉਹ ਆਪੇ ਕਰਨ ਵਾਲਾ ਹਾਂ ਆਤਮਰਾਮ ਆਪਣਾ ਆਪਮਿਓ ਨੂੰ ਨਰਜਿਨ ਜੀ ਆਇਆ ਆਪਣੇ ਆਪੇ ਦੀ ਮਨੋਂ ਆਪਣੇ ਆਪ ਦੇ ਦੀ ਸਭ ਮੰਦੀ ਆ ਆਪਣੇ ਆਪ ਕੋਈ ਵਿਅਕਤੀ ਦੇ ਤੌਰ ਤੇ ਵੀ ਦੱਸੋ ਹਟ ਮਾਰਦਾ ਸਰੀਰ ਕੋ ਆਪਣੇ ਆਪ ਨੂੰ ਵੀ ਪਸਤਾ ਉਹਦਾ ਆਤਮਿਕ ਜੋ ਲੈਰ ਹਦਾ ਸਰੀਰ ਤੋਂ ਤੂਕ ਤੇ ਜੋਦੀ ਬੋਦਿਆ ਉਹ ਉਹ ਸਮਝ ਹਦੀ ਕੋ ਦਿਨ ਉਹਦਾ ਉਹ ਵੀ ਜਾਂਦੀ ਆ ਜਦ ਆਦਮ ਦਰਸੀ ਹੁੰਦਾ ਜਿਸ ਨਜ਼ਰੀ ਆਇਆ ਦਾਸ ਦਸੰਤਰ ਭਾਇ ਤੇ ਨਹੀਂ ਪਾਇਆ ਦਾਸ ਦਾ 70 ਨਾ ਬਾਕੀ ਦਾਸ ਦਸੰਤਰ 65 ਤੇ ਨਹੀਂ ਭਾਇ ਤੇ ਨਹੀਂ ਪਾਇਆ ਭਾਇ ਤੇ ਨਹੀਂ ਪਾਇਆ ਜਿੱਦਾਂ ਉਹ ਜੁੜਦੇ ਨਹੀਂ ਹੋਰ ਬੱਤ ਉਹ ਔਰ ਜਿਹੜੇ ਦਾਸ ਬਣ ਜਾਂਦੇ ਨੇ ਉਹ ਜੇ ਦਾਸ ਬਣ ਜਾਂਦਾ ਜੁੜ ਕੇ ਨਾਲ ਪਾਏ ਹਰ ਉਹਨਾਂ ਨੂੰ ਇਹ ਭੁੱਖ ਹੋਵੇ ਦੀ ਭੁੱਖ ਲੱਗਿਆ ਦੇ ਇਸ ਗਿਆਨ ਦੀ ਉਹਨਾਂ ਨੂੰ ਪ੍ਰਾਪਤੀ ਹੋ ਜਾਵੇ ਸੰਗਤ ਦੇ ਵਿੱਚ ਉਹਦੇ ਸੰਗਤ ਵਿੱਚ ਭੁੱਖ ਹੋਵੇ ਪ੍ਰਾਪਤੀ ਹੋ ਜਾਂਦੀ ਪਾਏ ਤੇ ਨਹੀਂ ਪਾਇਆ şart ਹੈ ਪ੍ਰਾਪਤੀ ਉਹਨਾਂ ਨੂੰ ਹੋ ਗਿਆ ਜਿਨ੍ਹਾਂ ਦੇ ਅੰਦਰ ਜਿਹੜੇ ਚਾਹੁੰਦੇ ਸੀ ਨਹੀਂ ਚਾਹੁੰਦੇ ਸੀ ਉਹਨਾਂ ਨੂੰ ਪ੍ਰਾਪਤੀ ਨਹੀਂ ਹੁੰਦੀ ਨੂੰ ਪਾਏ ਤੇ ਨਹੀਂ ਪਾਇਆ ਪਾਏ ਜੇ ਗੱਲੋਂ ਪਾਵੀ ਹਾਂ ਹਾਂ ਕੋਈ ਨਹੀਂ ਪ੍ਰਾਪਤੀ ਦੀ ਆ ਕਿਹਨੂੰ ਪ੍ਰਾਪਤੀ ਸਾਰੇ ਉਹ ਨਹੀਂ ਪ੍ਰਾਪਤੀ ਹਾਂ ਸਦਾ ਨੈਗਟਿਵ ਨੈਗਟਿਵ ਹਰ ਜਾਨ ਸੋ ਦਾਸ ਦਰਗਾਹ ਪਰਮਾ ਸਗਾ ਨੈਗਟਿਵ ਦਿੱਖਦਾ ਆ ਜਿਹੜਾ ਹਰ ਉਹ ਸਦਾ ਹੀ ਦਿੱਖਦਾ ਹਾਂ ਕੋਈ ਉਹੀ ਗੱਲ ਆ ਕਿ ਲਾਈਟ ਤੋਂ ਬਲਵਕ ਦੀ ਦੂਰ ਹੈ ਸੂਰ ਤੋਂ ਦੂਰ ਨਹੀਂ ਹਰ ਵਕਤ ਨਾਲੇ ਉਹ ਇਸ ਕਰਕੇ ਹਰ ਹੈ ਜਿਹੜਾ ਐਵੇਂ ਹਰ ਵਕਤ ਨਾਲਾ ਜਿਵੇਂ ਸੂਰਜ ਦੀ ਧੁੱਪ ਦੇ ਨਾਲ ਨਾਲੇ ਘੜ ਡਿੱਟ ਫਰਦਾ ਡਿੱਟ ਡਿੱਟ ਹਰ ਜਾਨ ਹਰ ਦੂਰ ਡਿੱਟੇ ਬੰਦੇਓ ਕਿਤੇ ਹਰ ਦੂਰ ਅਡਰਾਂ ਨਾਲੋਂ ਆਪਣੇ ਨੂੰ 16 ਦਸ ਦਰਗਾਹ ਪਰਵਾਣ 16 ਦਸ ਦਰਗਾਹ ਜਿਹੜਾ ਨੇ ਜਾਣ ਲਵੇ ਉਹ ਉਹ ਦਰਗਾਹਾਂ ਚ ਪਰਵਾਣ ਉਹ ਦਾਸ ਹੈ ਵਕਈ ਦਾਸ ਹੈ ਉਹਦਾ ਦਾਸ ਹੋਣਾ ਪਰਵਾਹ ਨਾ ਜੇ ਮੂਹੂਜ ਦਾਸ ਕਹਿੰਦਾ ਫੇਤੀ ਪਰਵਾਹ ਨਾ ਜੇ ਉਹ ਦੇਮਨ ਦਾ ਨਿਕਟ ਪ੍ਰਚਾਰ ਦਾ ਕਰਦਾ ਦੂਰ ਦਾ ਬਾਹਰ ਕਹਿੰਦਾ ਮੈਂ ਹਾਂ ਦਾਸ ਪ੍ਰਚਾਰਤਾ ਕਰਦਾ ਹਰ ਹੈਗਾ ਕੁਰਬਾਨੀ ਲਈ ਫਰਦਾ ਨਾਲ ਜਿਹੜੇ ਲਿਫਤੀਆਂ ਉਹ ਤਾਂ ਵੀ ਦੂਰ ਜਾਂਦੀਆਂ ਨੇ ਕਿੱਥੇ ਕਿੱਥੇ ਆਸ਼ਰਦ ਕਿੱਥੇ ਸਰਦਾਰ ਨੇ ਸੋ ਦਿੱਟ ਹੱਜਾ ਨੂੰ ਠੀਕ ਫਿਰ ਉਹ ਬੰਦੇ ਬਾ ਉਪਲਿਵਾ ਤੁਸ ਨਗਰਦਾਨ ਗਿਆ ਇਹ ਤੋਂ ਅਗੇ ਫਸਾ ਨਹੀਂ ਹਨ ਕੁਰਬਾਨੀ ਉਹ ਫਰਫਾ ਫਰਨੇ ਤਾਂ ਜਾਨੇ ਸਿਮਾਂ ਫੋੜਾ ਕੇ ਯਾਰ ਕੁਰਬਾਨੀ ਤਾਂ ਆ ਗਈ ਤੇ ਤੂੰ ਆ ਗਿਆ ਜੀ ਕੁਰਬਾਨੀ ਦਾ ਥੋੜਾ ਮੇਲੇ ਹੈ ਕਿਉਂਕਿ ਕੋਹ ਹੋਰ ਵੀ ਮੰਦੇ ਨਾ ਕੋਈ ਖੁੱਲ ਕੇ ਕੁਰਬਾਨੀ ਨੂੰ ਨਹੀਂ ਸਮਝਦਾ ਨਹੀਂ ਕੋਈ ਸੁਆਦ ਕਰੀ ਲੇ ਸੋਤੀ ਜੀ ਅੱਜ ਮੈਂ ਇਹ ਦੇ ਗੁਰਬਾਨਾਂ ਦਰਦਿਆਂ ਗੁਰਬਾਨੀ ਤੇ ਇਹ ਵੀ ਮੰਨਿਆ ਜਾਣਾ ਤੁਪੜੀ ਇਸ ਕਰਕੇ ਆਪ ਵੀ ਸਕੇ ਹੋਈ ਜਦੋਂ ਅਥਾ ਲੋਕ ਹੈ ਆਪਣੇ ਆਪ ਨੂੰ ਜਸਦੀ ਕਰੀ ਜਿੰਦਾ ਸਾਡੀ ਗੁਰਮਤਿ ਨਾਲੇ ਮਤ ਨਾਲੇ ਕਰੀ ਗੁਰਬਾਨੀ ਵੀ ਪ੍ਰਚਾਰ ਕਰੀ ਅਸੀਂ ਆਹ ਸਾਡੀ ਗੁਰਬਾਨੀ ਆ ਸਾਡਾ ਹੈ ਜੀ ਅਸੀਂ ਵੀ ਵੜਦੇ ਪ੍ਰਚਾਰ ਕਰਦੇ ਹਾਂ ਰੋਜ਼ ਦੇ ਕੰਮ ਬੰਦ ਕਰਦੇ। ਵਾਜੀ ਆਪਣੇ ਦਾਸ ਕੋ ਆਪ ਕਿਰਪਾ ਕਰੇ ਆਪਣੇ ਦਾਸ ਕੋ ਆਪ ਕਿਰਪਾ ਕਰੇ ਇਸ ਦਾਸ ਕੋ ਸਭ ਸੋਚੀ ਪਰ ਜਿਹੜੇ ਜਿਹੜਾ ਉਹ ਦਾਸ ਹੁੰਦੀ ਤੇ ਆਪਣੀ ਕਿਰਪਾ ਆਪ ਕਰ ਦਿੰਦਾ ਉਹ ਦਾਸ ਬਣ ਜਾਂਦਾ ਜੇ ਕਿਰਪਾ ਨਹੀਂ ਕਰਦਾ ਉਹ ਤੇ ਸਮਾਰੀ ਹੋ ਜਾਂਦੀ ਸੋਚੀ ਹੋ ਜਾਂਦੀ ਹੈ ਉਹਨੂੰ ਦਰਦ ਹੋ ਜਾਈਏ ਜੀ ਇਸ ਦਾਸ ਨੂੰ ਸਭ ਸੋਚੀ ਪਰ ਹੈ ਹੱਥ ਟੋੜੂ ਦਰਦ ਹੋ ਜਾਈਏ ਜੀ ਇਹਦਾ ਬੋਲ ਹੈ ਕੁਰਬਾਨੀ ਲੱਗ ਰਿਹਾ ਉਹਦੇ ਕੋ ਸਭ ਸੋਚੀ ਹੈ ਸਭ ਸੋਚੀ ਪੜਦਾ ਹੈ ਸਾਗਰ ਸੰਗ ਸਾਗਰ ਸੰਗੀ ਆਦਮ ਉਦਾਸ ਐਸੀ ᔪਗਤੀ ਨਾਨਕ ਰਾਮ ਦਰਾਂ ਸਾਗਰ ਸੰਗ ਆਤਮਾ ਦਾਸ ਸਾਰੇ ਆਂ ਦੀ ਸੰਕਟ ਕਰਦਾ ਹੈ ਹੋ ਸੱਚਖੰਦ ਦੇ ਵਿੱਚ ਸਾਰਿਆਂ ਦੀ ਸੰਕਟ ਕਰਦਾ ਹੈ ਪਰ ਆਤਮ ਕਰਕੇ ਆਤਮ ਕਰਕੇ ਉਦਾਸ ਆਤਮ ਉਦਾਸ ਸਗਲ ਸੰਗੀਰ ਆਤਮ ਉਦਾਸ ਆਤਮ ਆਤਮਾ ਕਰਕੇ ਉੱਤੇ ਉੱਠਿਆ ਮਾਇਆ ਤੋਂ ਉੱਤੇ ਸਿਰ ਆਸ ਤੋਂ ਉੱਤੇ ਉੱਠਿਆ ਹੋਇਆ ਐਸੀ ਜੁਗਤੀ ਨਾਨਕ ਰਾਮ ਦਾ ਅਜੀਬ ਜੁਗਤੀ ਆ ਰਿਹਾ ਹੈ। ਸਾਰੇ ਆਂ ਦਾ ਨਾਲ ਜੁੜਿਆ ਹੋਇਆ ਵੀ ਸਾਰੇ ਸੰਸਰ ਦੇ ਨਾਲ ਜੁੜ ਕੇ ਜਾਣ ਵਾਲਾ ਵੀ ਆਤਮਾ ਕਰਕੇ ਕਿਸੇ ਨਾਲ ਜੁੜਿਆ। ਸ਼ਬਦ ਕਰਕੇ ਜੁੜਿਆ ਹੋਇਆ ਸਾਰੇ ਆਂ ਪਰਮੇਸ਼ਰ ਸ਼ਬਦ ਕਰਕੇ ਸਾਡੇ ਨਾਲ ਜੁੜਿਆ ਹੋਇਆ ਹੈ ਸਰੀਰ ਕਰਕੇ ਨਹੀਂ ਜੁੜਿਆ ਜੇ ਸਰੀਰ ਕਰਕੇ ਜੁੜ ਜਾਂਦਾ ਫਿਰ ਸਾ ਤੋਂ ਕਿਸੇ ਜਾਨ ਦੀ ਲੋੜ ਨਹੀਂ ਸੀ ਪਾਉ ਦਾ ਮੇਰਾ ਜੱਟਿਆ ਨਾਲ ਮਿਲਦੀ ਜੇ ਉਹਦਾ ਗਾਇਸੇ ਸਾਡੇ ਅੰਦਰ ਆ ਜਾਂਦਾ ਜੁੜਦੀ ਜੀ ਨਾਲ ਜੋੜਦੀ ਆਪਣਾ ਜਿਵੇਂ ਸਾਫ ਕਰਦੀ ਰੋਡ ਨਾ ਬੱਤੀ ਦੀ ਰੋਡ ਨਹੀਂ ਉਹ ਜਿਹੜਾ ਪੂਰਨ ਪਰਮਾਤਮਾ ਦਾ ਸਰੂਪ ਹੈ ਉਹ ਪਿੱਛੇ ਗੰਢੀ ਤੇ ਦੁਪਨ ਤਲੀਂ ਦੂਰ ਸਾਡੇ ਆਲਾ ਮਨ ਸਾ ਨਾਲ ਜੱਡੇ ਰਹੂਗਾ ਇਦਾਂ ਨਹੀਂ ਕਰਦਾ ਇਦਾਂ ਨਹੀਂ ਕਰਦਾ ਜਿਹੜੀ ਰੋਸ਼ਨੀ ਸਾਡੇ ਵਿੱਚ ਸਾਡੂੰ ਰੋਸ਼ਨੀ ਆਪਣੇ ਵਿੱਚ ਪੈਦਾ ਕਰਦੀ ਬਊਗੀ ਉਹਦੇ ਵਿੱਚ ਪੂਰੀ ਹੈਗੀ ਹੈ ਰੋਸ਼ਨੀ ਦੇ ਸਕਦਾ ਰੋਸ਼ਨੀ ਪੈਦਾ ਕਰਤੀ ਦਿੱਤੀ ਸਕਦਾ ਰੋਜ਼ ਨੇ ਰੋਜ਼ ਸਾਨੂੰ ਸ਼ਬਦ ਦੱਸ ਸਕਦਾ ਬੋਲ ਸਕਦਾ ਬੋਲ ਸਮਝ ਕੇ ਰੋਸ਼ਨਾ ਅਸੀਂ ਆਪ ਹੁੜੇ ਰੋਸ਼ਨਾ ਆਪ ਹੁੜੇ ਰੋਜ਼ਾਂ ਆਪਕ ਨੇ ਹੋਈਦਾ ਜਿੰਨੀ ਇਤਨਾ ਸੁਤੀ ਪਈ ਆ ਉਹਦੀ ਰੋਸ਼ਨੀ ਘਟ ਹੈ ਜੇ ਕੋਈ ਸੱਤਫਤ ਨਾ ਜੁਟਦਾ ਤਾਂ 40% ਲੈਟ ਹੁੰਦਾ ये, ये 40 दिहाड़ी दे जाघन लागि वे गति चल पवे 7 पाई 40% ज्यादा hmm. है जे तो उही दुर्गती उध चले की बेटा 34 गतिवा दु और 35% चले नो लिजु नरक वादु 40% तो चले नो आजु ये गति पा नहीं परे 40 41 फुतु कम 70% तक के लदा है ਜੇ ਪਰਪਰਤੀ ਆਈ 60% ਹੋ ਗਈ ਰੁਕ ਜਾਵੇ ਇਸ ਰੁਕਣਾ ਦੇਖ ਪਰਪਰਤੀ ਵਾਲਾ 60% ਦੇ ਰੁਕਦਾ ਹੈ ਅੱਗੇ ਫਿਰ ਰੁਕਦਾ ਦਕੇ ਪਰਪਰਤੀ ਆ ਗਏ ਉਦੋਂ ਪਹਿਲੀ ਪਹਿਲੀ ਗਤੀ ਆ ਜਿਹੜੀ ਜਿੱਤੇ ਗਤੀ ਆ ਉੱਥੇ ਰੁਕ ਸਕਦਾ ਜਿੱਤੇ ਗਤੀ ਪਾਈਓ ਉੱਥੇ ਰੁਕ ਸਕਦਾ ਗਤੀ ਕਿਤੇ ਤੱਕ ਗਤੀ ਤੱਕ ਸੋ ਤੋਂ ਗੁਣ ਤੱਕ ਸਦਾ ਹੋਂਟਾ ਗਤੀ ਹੈ ਜੇ ਸਤੋਂ ਕੋਲ ਤੇ ਆ ਗਏ ਉੱਚਲੇ ਘਰ ਮਰਣ ਕੋ ਵਿਚ ਕੇ ਸੀ ਹੋ ਗਿਆ ਤੇ ਫਿਰ ਪੜਾ ਲਿਆ ਉਹਨੂੰ ਤੇ ਆਪਣਾ ਸਰੋਵਰ ਜਿਆ ਬਣਾ ਕੇ ਨਾ ਫਿਰ ਆਪਣਾ ਦੇਰ ਬਣ ਗਿਆ ਉੱਥੇ ਅਜੇ ਤਾਂ ਗਿਆ ਨਾ ਰਹਿ ਜਾਊਗਾ ਜੇ ਦਹਾਨੰਦ ਦੇ ਹਉਦੋਂ ਆਪਣੀ ਜਿਹੜੀ ਪਰਸਨਲ ਹੋਣਾ ਜਿਹੜੀ ਇੱਜ਼ਤ ਹੈ ਪਰਸਨਲ ਮਤਲਬਾ ਉਹ ਚਾਹੁੰਦਾ ਵੀ ਅਸਾਂ ਤਾਂ ਅਸਾਂ ਤਾਂ ਜਿਹੜੀ ਇੱਜ਼ਤ ਨਹੀਂ ਜਿਆਦਾ ਹੋਵੇ ਜੇ ਤਾਂ ਇੱਕ ਨੂੰ ਪੈ ਗਿਆ ਹੋਵੇ ਤਾਂ ਉਹ ਡੇਰੋ ਮੈਂ ਨਤੀਜੇ ਬਣਾਉਂਦਾ ਰਾਲੇ ਵਾਲਾ ਕਹਿੰਦਾ ਕਿ ਇਹ ਤਾਂ ਕੇਰਾ ਡੇਰ ਨਹੀਂ ਕਦੇ ਪੰਜਾਬ ਦੇ ਵਿੱਚ ਦੂਰ ਦੂਰ ਤੱਕ ਪਹਿਲਾਂ ਫੜੇ ਹੋਏ ਨੇ ਆਪਣੇ ਪਿੰਡਾਂ ਦੇ ਵਿੱਚ ਇਹ ਹਸਤਾਜਾ ਪ੍ਰਤੀਸ਼ੀਰ ਲੋਕ माया ना तोर्दे मारा ना हो माया ना तोले नै ऐना ना, ना ज्यादा संतुखी थे परान जिन्होंदे तेरे छोटे थे ओ माया तब दूरंद नि महाराज प्रचारन किया तो माया आता रे नडेर सीट बैठन उठे ये रहने माया माया कहानियां भी थी की बोलदे थे ओ ਕਹਿੰਦੇ ਸੀ ਉਹਨਾਂ ਨਾਲ ਕਹੇਗੇ ਬੰਦੇ ਸੰਸਾਰਿਕ ਤੇ ਇਹਨਾਂ ਨਾਲ ਕਹੇਗੇ ਸੀ ਅੱਜ ਗੁਰਨੇ ਸਿੱਖ ਨੇ ਤੇ ਸਾਬਤ ਦੇ ਦਿੱਚੇ ਬਿਨਾਂ ਸਿੱਖੀ ਦਾ ਗਿਆਨ ਆਉਣਾ ਕੋਈ ਨਹੀਂ ਸਿੱਖਾ ਕਿਥੋਂ ਜਾਨਣਾ ਟੋਟਲ ਹਿੰਦੂ ਮਸਾਤਾ ਲੈਣੇ ਹਨ ਜਿਹਨਾਂ ਨੇ ਹੱਤਾਂ ਨਾਲ ਸ਼ਾਦੀਆਂ ਪਿਆਰ ਸ਼ਾਦੀਆਂ ਸਾਰੇ ਉਹ ਤੇ ਵੇਖੋ ਇੱਕ ਵੀ ਬੰਦਾ ਨਹੀਂ ਜਿਹੜਾ ਨਾ ਕੋਲਦਾ ਹੋਵੇ ਤੇ ਲਗਾ ਲੂ ਉਹ ਕੋਈ ਆਪੇ ਨਾ ਸਿੱਧੀ ਵਾਲੀ ਗੱਲ ਹੈ ਹੋਣੀ ਸੀ ਸਿੱਧੀ ਦੇਖਾ ਸਿੱਧੀ ਦੇ ਨਾਲ ਜਿੱਤੀ ਪੜਾਈਆਂ ਨਾ ਹੋ ਪੜਿਆ ਆਹ ਮਾਇਆ ਦੀ ਲੋਕਾਂ ਨੂੰ ਭੁਗਵੀਂ ਮਾਇਆ ਕਰਕੇ ਨਾ ਕਹਿੰਦੇ ਵੀ ਇਹ ਸੰਤਾਂ ਨੇ ਕਰੀ ਦੇਆ ਬੱਦ ਉਹ ਵੀ ਇਹ ਕਹਿੰਦੇ ਵੀ ਆਹ ਪਾਸਤ ਸੂਰ રાલે આલગા બડડા કીસી લોગ ને ભગત સુર મેદાન ને ચિન્ને જોતે રહે છે જાગજે જાગજે તને બનતે જો મે રહેને ને કે ભગત એ સુર મે આ દાદી દાદી અપને બરાબર બનાતા થા ભગત તું સારી જિંદગી ભક્તિ ਕੀਤੀ હે કને તાં સા તાં સા પૈઠાનીઓ કો અપને બરાબર માલ લેતા તાં ਪਈ ਤੋਂ ਤੇਰੇ ਕੋ ਮਾਇਆ ਦਿੱਤੀ ਹੈ ਪਰ ਮਾਇਆ ਨੂੰ ਦੋਹੇ ਦਾ ਆਪਣਾ ਆਪਣਾ ਹਾਲ ਹੈ। ਵਾਹ ਹੈ ਜਦੋਂ ਆਪਣਾ ਲੀਚਾ ਦੋਹੇ ਬਰਾਬਰ ਹੋ ਗਏ। ਬਣੀ ਉਹ ਹੋਂ ਦਾ ਮਾਇਆਦਾਰੀਆਂ ਦੀ ਦੋਹਾਂ ਦੀ, ਹੈ ਉਹ ਮਾਇਆਦਾਰੀ ਹੈ। ਸੱਤ ਲੋਭੀ ਹੈ ਉਹ ਮਾਇਆਦਾਰੀ ਹੈ, ਦੋ ਇਕੱਠੇ ਹੋ ਕੇ ਤਾਂ ਡੇਰੇ ਬਣ ਗਏ। ਲੋਭੀ ਮਾਇਆਦਾਰੀਆਂ ਦੇ। ਲੋਭੀ ਮਾਇਆਦਾਰੀ ਵਰਵਾਣੇ ਕਹਿੰਦੀ ਹੋ। ਹਾਂਜੀ। ਸਭ ਨੂੰ ਸਤ ਸ੍ਰੀ ਅਕਾਲ ਜੀ ਜੀ ਬੰਗੜੀ ਜਾਣਾ ਉਹਦਾ ਕਿਹੜਾ ਵੀ ਪਾਈਂ ਗਾਣਾ ਵੇਣਾ ਸੀ ਪਹਿਲਾਂ ਪਾਟਾ ਮੈਂ ਨਾਮ ਸੇਬ ਨੇ ਕਿਹੜੀ ਗੱਲ ਜਿਹਾ ਕੀਤੀ ਸੀ ਉਹ ਤਾਂ ਉਹ ਹੀ ਲੱਗਦੀ ਸੀ ਸਕਲ ਸੰਗ ਆਤਮ ਉਦਾਸ ਐਸੀ ਯੁਗਤੀ ਨਾਨਕ ਰਾਮ ਦਾ ਸੀ ਸਕਲ ਸੰਗ ਆਤਮ ਦਾ ਰਾਸ ਸਾਰੇੰਧੀ ਸੰਸਤਰਾ ਜੁੜਿਆ ਹੋਇਆ ਹੈ ਸਬਦ ਕਰਕੇ ਉਪਦੇਸ਼ ਸਾਰਿਆਂ ਨੂੰ ਦੇ ਰਿਹਾ ਹੈ ਚਾਹੁੰਦਾ ਸਾਰਿਆਂ ਇਹ ਚਾਹੁੰਦਾ ਹੈ ਇੱਛਾ ਸਾਰਿਆਂ ਦੀ ਉਹ ਸਾਰਿਆਂ ਪਾਸਤੇ ਹੀ ਉਹਦੀ ਅੱਛੀ ਹੈ ਆਤਮ ਉਦਾਸ ਆਤਮਾ ਕਰਕੇ ਸੁਖਾਂੰਦ ਗੁਰੂ ਆਤਮਾ ਕਰਕੇ ਸੁਖਾਂੰਦ ਜੇ ਆਤਮਾ ਕਰਕੇ ਜੁੜ ਗਿਆ ਕੋ ਹੋ ਜਾ ਆਤਮਾ ਕਰਕੇ ਜੁੜਿਆ ਮਾਸ਼ਾ ਅੱਪਰ ਸਾਥਗਾਨਾ ਮੈਂ ਦਾ ਸਾਥਗਾਨ ਜਾਲ ਇਹਨਾਂ ਨੇ ਫੇਰਣਾ ਇਹਨਾਂ ਨਾਲ ਜੁੜ ਕੇ ਮੈਂ ਫੇਰਣਾ ਇੱਛਾ ਰਖਦਾ ਵੀ ਚੱਲਣ ਨਾਲ ਨਾਲ ਇੱਛਾ ਕਰਦਾ ਮੇਰੇ ਨਾਲ ਚੱਲਣ ਸਾਰੇ ਆਤਮ ਉਦਾਸ ਆਰੇ ਸੰਸਤਨੋਂ ਨਾਲ ਲਾ ਜਾ ਕੇ ਚਾਹੁੰਦਾ ਵੀ ਚਲੇ ਜਾਂ ਆਤਮ ਉਦਾਸ ਬਣ ਆਤਮਾ ਕਰਕੇ ਉਦਾਸ ਹੈ ਦੂ ਮਤਲਬ ਸੰਸਤਨਾਂ ਜਿਹੜੇ ਅੱਜ ਵੀ ਜੇ ਇਹ ਨਹੀਂ ਜਾਣਗੇ ਤਾਂ ਬੋ ਨਹੀਂ ਜਾਊਗਾ ਇਹ ਨਹੀਂ ਗੱਲ ਹੈ 50 ਇਹ ਨਹੀਂ ਆ ਸਕੇ ਆਏ ਨਹੀਂ ਮੰਨ ਰਿਹਾ ਗੱਲ ਮੈਂ ਉਦਾਸ ਹੋ ਜਾ ਆਤਮਾ ਕਰਕੇ ਵੀਰੂ ਡਿਆ ਹਰ ਕਿਸੇ ਨਾਲ ਆਤਮਾ ਕਰਕੇ ਜੁੜਾਉਂਦੇ ਉਹ ਹੁੰਦਾ ਹੋ। ਸੰਸਾਰੀ ਪ੍ਰੇਮਤਾ ਆਤਮਾ ਨਾਲ ਆਤਮਾ ਦੀਆਂ ਦੁਨੀਆ ਹੁੰਆਂ ਨਾ ਜਿਹੜਾ ਉਹ ਰੋਕਨ ਗੱਲਾਂ ਯਾਦ ਕਰਦੇ ਨੇ ਉਹਦੀਆਂ ਬਾਤ ਉਹ ਕੀ ਹੈ ਉਹ ਗੱਲਾਂ ਯਾਦ ਕਰਦੇ ਨੇ ਗੱਲਾਂ ਕੀ ਨੇ ਆਤਮਾ ਦੀਆਂ ਆਤਮਾ ਵੀ ਕਹਿੰਦੀ ਉਹ ਤੇ ਆਤਮਾ ਬੋਲਦਾ ਉਹ ਗੱਲਾਂ ਹੀ ਨੇ ਉਹ ਹੁੰਦੀਆਂ ਉਹ ਜਿਹੜਾ ਉਤੋਂ ਉੱਤੇ ਉੱਠ ਜਾਂਦਾ ਸੁਧਾਰੀ ਕਰਨਾਂ ਦੇ ਵਿੱਚ ਜੱਸ ਜੱਸ ਦੀ ਨਾ ਇਹ ਪੁੱਛ ਲੈਣਾ ਸਰਦਾਰ ਆਤਮਕਲਾ ਵਰਗੇ ਦੱਸਦੇ ਕਿ ਬਚਪਨ ਜਵਾਨੀ ਸਭ ਕੁਝ ਬਣਾਤਾ ਰਹਿੰਦਾ ਕਿਦਾਂ ਕੋਲ ਦਾ ਤਬੂਰੀ ਡੋਰ ਦਾ ਇਹ ਨੂੰ ਫੇਰਾਊਗਾ ਜੇ ਫੇਰਮਟ ਦੀ ਨਹੀਂ ਹੁੰਦੀ ਫੇਰ ਉਹਦਾ ਪ੍ਰਭਾਵ ਇੱਥੇ ਰਹੂਗਾ ਮਨ ਉਹ ਹੋਈ ਸੁਪਨੇ ਆਉਣ ਲੱਗਦੇ ਨੇ ਫਿਰ ਜਾਣੇ ਦੇਖਣ ਆਸੀਂ ਜਿਹੜੇ ਧਿਆਣਿਆਰੀਆਂ ਨਾਲ ਲੰਘਾਂ ਕਰ ਮਾਰ ਜਾਂਦੇ ਨੇ ਧਿਆਣਿਆ ਬਚਪਨ ਵਾਲੀਆਂ ਨਾਲ ਲੰਘਾਉਂਦੇ ਆ ਉਹਨਾਂ ਨੂੰ ਡਿਲੀਟ ਹੀ ਨਹੀਂ ਆਉਂਦਾ ਆ ਤੋਂ ਰਸਨੀ ਉਹ ਰੋਬੀ ਤੋਂ ਹੀ ਪਈ ਜਾ ਉਹ ਫੇਰ ਹੋਈ ਜਿਆਦਾ ਆ ਜਾਂਦੀ ਹੈ ਪਿੱਛੇ ਆ ਜੇ ਜੀ ਸਾਈਓ ਮਿਟ ਕੇ ਬੇ ਕਿੱਥੋਂ ਆਏ ਕਿੱਥੇ ਨਹੀਂ ਆਏ ਤੋ ਆਣਾ ਚੱਲ ਕੇ ਖਬਰ ਕਰਨਾ ਜਰੂਰ ਆਣਾ ਚੱਲੇ ਅਸੀਂ ਇਹ ਜੋ ਨੂੰ ਬੜੀ ਇੰਪੋਰਟੈਂਟ ਜਿਹੜੇ ਬੱਚੋਂ ਤੋਂ ਲੱਗੇ ਜਿਹੜਾ ਬਹੁਤ ਸਿਖਿਆ ਰਹਉਂਦਾ ਇਹ ਬੜਾ ਖਤਰਨਾਕ ਆ ਰਹੋ ਹੋਜੀ ਸੁਣਨਾ ਉਹ ਤੇ ਹਾਂ ਸਦਰ ਸੰਗ ਆਤਮੋਦਾਸ ਐਸੀ ਜੁਗਤ ਨਹੀਂ ਹੈ ਨਾਨਕਰਾਮ ਦਾ ਐਸੀ ਜੁਗਤ ਨਾਨਕਰਾਮ ਦਾ ਜਿਵੇਂ ਜੁਗਤ ਆਉਂਦੀ ਹੈ ਕੋ ਗੁਰੂ ਆ ਗੁਰੂ ਆ ਸਾਇੰਸ ਵਿਦੇਸ਼ ਕਰ ਰਿਹਾ ਹੈ ਕੋਈ ਆ ਕਰ ਰਿਹਾ ਹੈ ਜੀ ਜਾਨਣਾ ਕਰ ਰਿਹਾ ਹੈ ਪਰ ਕੌਣ ਮੰਨ ਰਿਹਾ ਕੌਣ ਨਹੀਂ ਮੰਨ ਰਿਹਾ ਉਹ ਨਹੀਂ ਦੱਸ ਸਕਦਾ ਇੱਛਾ ਆਪਣੇ ਅੰਦਰ ਕੋਈ ਇਛਾ ਦੀ ਵੇਨੂ ਹੈ ਜ਼ਰੂਰ ਹੈ ਪੜਾ ਕੇ ਹਟਾਣਾ ਇੱਛਾ ਨਹੀਂ ਕਰਦਾ ਮੈਂ ਤਾਂ ਇਹ ਜਿੱਦ ਕਰਦੀ ਮੈਂ ਆਦੂ ਰ ਆਪਣੀ ਇੱਛਾ ਕੋਈ ਨਹੀਂ ਹੈ ਕੌਣ ਕਰੇ ਕੌਣ ਕਰੇ ਪਰਮੈਸ਼ਰ ਦੀ ਇੱਛਾ ਉਹ ਬੁਲਾਉਂਦਾ ਕੋਣ ਦਾ ਕੌਣ ਸੁਣਦਾ ਕੌਣ ਸਮਝਦਾ ਕੌਣ ਨਹੀਂ ਸਮਝਦਾ ਕੋਈ ਕਹਿਣ ਵਾਲੀ ਦਾ ਕਰਮ ਨਹੀਂ ਕੋਈ ਕਰਦਾ ਇਸ ਤੋਂ ਸਭਾ ਇਹ ਸੰਦਾਨਾ ਉੱਪਰ ਦੇ ਨਹੀਂ ਬਣਿਆ ਜਦੋਂ ਤੇ ਪੈਸਾ ਲੱਕੀ ਜੀ ਜੋ ਆਏ ਦੀ ਸੀ ਮਾਦੇਵ ਉਹ ਕਿਦਾ ਜੀ ਬੁਰਾਈ ਕਰਦਾ ਚੌਥੇ ਪਾਸੇ ਉਹਨਾਂ ਦਾ ਫਰਕ ਕਰਦੈ ਨਾ ਜੀ ਜੇ ਆਜਾ ਬਾਪਨਾ ਕਰ ਲਿਆ ਉਹਨਾਂ ਨਾਲ ਗਲਤ ਕੋਈ ਹੈ ਉਹ ਗੁਰ ਰਾਮ ਦਾ ਡਿਊਟੀ ਦਾ ਅਧਿਕਾਰ ਬੰਨ੍ਹੇ ਪਾਸਾਰ ਜੇ ਬੰਨ੍ਹੇ ਪਾਸਾ ਦਾ ਵਿਰੋਧ ਕਰ ਲੈਣਾ ਕਰ ਬਾਪ ਦਾ ਵੀ ਰਹਿਣ ਸੀ ਪ੍ਰਗਟ ਜੀ ਸੀ ਕਰਦੇ ਹੋ ਉਹ ਤਾਂ ਪ੍ਰਗਟ ਤਾਂ ਨਹੀਂ ਸੀ ਕਰਦਾ ਇਹ ਫਿਰ ਗੁਰਾਈ ਦੀ ਨਹੀਂ ਫਰਗਟ ਵੀ ਹੁੰਦਾ ਹੋਊਗਾ ਥੋੜਾ ਬਹੁਤਾ ਜ਼ਰੂਰ ਫਰਗਟ ਵੀ ਹੁੰਦਾ ਹੋਊਗਾ ਤਾਂ ਹੀ ਗੜਾਈ ਬੜੀ ਜਿਹੜੇ ਸੱਚੇ ਖਪਣ ਸ਼ਿਕਾਇਤਾਂ ਆਉਂਦੀਆਂ ਆਪਾਂ ਦੇ ਖਿਲਾਫ ਉਹ ਜਹਾਂ ਜਹਾਂ ਰੌਣਕ ਹੋਣਗੀ ਤੇ ਇਹ ਗੱਲ ਨਹੀਂ ਸੀ ਗੱਡੀ ਚਾਹੀਦੀ ਐਦਾਂ ਨਹੀਂ ਕਹਿਣਾ ਚਾਹੀਦਾ ਐਦਾਂ ਐਦਾਂ ਕੁਝ ਨਹੀਂ ਗੱਲਾਂ ਹੁੰਦੀਆਂ ਗੱਲ ਗੱਲਾਂ ਕਹਾਣੀਆਂ ਚਾਹੀਦੀਆਂ ਆਪਣ ਨੂੰ ਬੋਦਾ ਜੀ ਕਾ ਵੀ ਨਹੀਂ ਉਹ ਨਾ ਕਰੀਂ ਬੋਦਾ ਹਾਂਜੀ ਐਸੀ ਜੁਗਤੀ ਨਾਨਕ RAM ਦਾ ਐਸੀ ਜੁਗਤੀ ਜਿਹਦੇ ਕੋਲੋਂ ਬੇ ਨਾਨਕਾ ਨੂ ਰਾਮ ਦਾ ਸਗਲ ਸੰਗ ਆਸਾ ਸੋਲਾ ਸਾਰਿਆਂ ਨਾਲ ਕੋੜਿਆ ਮੜਿਆ ਹੋਇਆ ਵੀ ਕਿਸੇ ਨਾਲ ਵੀ ਕੋੜਿਆ ਫੜਿਆ ਹੋਇਆ ਆਇਆ ਵਿਚੂ ਦਾ ਜੀ ਸਾਰਿਆਂ ਨਾਲ ਸਾਧਾਂ ਨੂੰ ਪ੍ਰੇਮ ਕਰਨ ਵਾਲਾ ਵੀ ਕਿਸੇ ਨਾਲ ਪ੍ਰੇਮ ਨਹੀਂ ਕਰਦਾ ਕਿਸੇ ਨਾਲ ਬੋਲ ਨਹੀਂ ਕਰਦਾ ਸਾਰਿਆਂ ਨੂੰ ਆਪਣਾ ਸਮਝਦਾ ਹੋਇਆ ਵੀ ਕਿਸੇ ਨੂੰ ਆਪਣਾ ਜਿਸਮੰਤਲ ਕਿਸੇ ਨੂੰ ਬੋਲਦਾ ਉਹ ਨਹੀਂ ਸਮਝਦਾ ਕਿਸੇ ਉਹਦਾ ਸਮਝਦਾ ਵੀਰਾ ਦਾ ਅਕੀਲਾ ਸਾਰਿਆਂ ਨੂੰ ਆਪਣਾ ਸਮਝਦਾ ਆਪਣਾ ਹਸਤਕ ਸਾਰੇ ਨੂੰ ਆਪਣਾ ਸਮਝਦਾ ਹੋਇਆ ਵੀ ਕਿਸੇ ਨੂੰ ਰਹਾਣਾ ਨਹੀਂ ਸਮਝਦਾ ਇਹ ਆਪਣਾ ਨਹੀਂ ਹੈ ਆਕਾਪਨ ਚਾਚੇ ਦਾ ਪੁੱਤ ਦਾ ਸਦਾ ਭਾਈ ਦੇ ਹੱਥ ਪਈ ਮਾਪੇ ਦੇ ਪੁੱਤ ਚਾਚੇ ਦੇ ਪੁੱਤ ਦੀ ਹੱਥ ਪਈ ਜੇ ਤਾਂ ਪੈਣ ਉਹ ਇਥੇ ਆਤਮਾ ਦੇ ਲੈਵਲ ਦੀ ਗੱਲ ਹੈ Amen. Amen. Amen.